फिर फिर फाहि फासे कौवा फिर पछताना अब क्या हुआ फिर फिर भाई फसे कौवा अमन कौवा मोर कौवा फिर फस गया दूसरी जरूर च करदा दी फसला दी गुड़ के बड़ा चिल्ला के अच्छा फिर भाई इस फस गया चौका छोड़ गया फस गया सिर पर भाई फसा कौआ फिर पसंद ना अब क्या हुआ फिर बताया भैया अब फिर फस गया माता जोग जोगे ने सूझे सतगुरु मिले तां आखी सूझे फत्ता जोग जुया ने पताई नहीं वे फसाए जोग जोग दो चौगादा चुभी जांदा ਸਤਗੁਰ ਮਿਲਦਾam ਕੀ ਸੀ ਜੇ ਗਿਆਨ ਦਾ ਸਰਮੋ ਪੈ ਜਾ ਅੱਖਾਂ ਚ ਤੇ ਦੇਖ ਜਾਂਦਾ ਜਾਲ ਵੀ ਉਹ ਜਾਲ ਕੀ ਹੈ ਠੀਕ ਹੈ ਸਤਗੁਰ ਵੀ ਚਲ ਤੂੰ ਪੈ ਜਾ ਅੱਖਾਂ ਦੇ ਵਿੱਚ ਇਹਦੀਆਂ ਅੱਖਾਂ ਨੂੰ ਦੇਖਿਆ ਅੱਖਾਂ ਅੱਖਾਂ ਵੀ ਇਹਦੀਆਂ ਬੁਆਲੇ ਅੱਖਾਂ ਨੂੰ ਝੂਠ ਕੱ ਲੱਗੇ ਆਇਆ ਤਾਂ ਦੀ ਦੋਜੀ ਜਾਲ ਹਾਂਜੀ ਜਿਉ ਮੱਛੀ ਫਾਤੀ ਜਮਕਾਲ ਬਿਣਗੁਰ ਦਾਤੇ ਪਾਲ ਅ ਜਿਉ ਮੱਛੀ ਫਾਤੀ ਦੇ ਜਾਲ ਜਾਲ ਚ ਬੁੱਚੀ ਫਸ ਜਾਂਦੀ ਹੈ ਹੂੰ ਬਿਣਗੁਰ ਦਾਤੇ ਮੁਕਤ ਨੂੰ ਨਹੀਂ ਮਿਲ ਸਕਦੀ ਹੂੰ ਵੀ ਮੁਕਤੀ ਬੁਝ ਜਾਂਦੀ ਹੈ ਜਦੋਂ ਉਝਾਲ ਜਾਂਦਾ ਹੈ ਨਾ ਜਦੋਂ ਆਈਆ ਪਿੱਛੇ ਨੂੰ ਜਾਵੇ ਪੂਰੇ ਨੂੰ ਭੱਜੇ ਵਾਰ ਬੂਖ ਲਈ ਹੁੰਦਾ ਜਦੋਂ ਹੋਰ ਵਾਰ ਦੀਨ ਉਦੋਂ ਪਾਛੇ ਕੇ ਬਾਹਰ ਨਿਕਲ ਜਾਈ ਠੀਕ ਹੈ ਫਿਰ ਫਿਰ ਆਵੇ ਹਾਂਜੀ ਜਾਨ ਤੋਂ ਬਿਨਾ ਮੁਕਤੀ ਨਹੀਂ ਹਾਂਜੀ ਹਾਂ ਫਿਰ ਫਿਰ ਆਵੇ ਫਿਰ ਫਿਰ ਜਾਏ ਇੱਕ ਰੰਗ ਰਚੈ ਰਹਿ ਲਿਵਲਾਈ ਫਿਰ ਫਿਰ ਆਵੇ ਫਿਰ ਫਿਰ ਜਾਏ ਫਿਰ ਜੁੰਧਾ ਰਹੇ ਫਿਰ ਫਿਰ ਮੰਤਾਰ ਰਹੇ ਰੰਗ ਰਚੈ ਇੱਕ ਲਿਵਲਾਈ ਠੀਕ ਹੈ ਇਹ ਵੀ ਇੱਕ ਰੰਗ ਦੇ ਵਿੱਚ ਆਹ ਹੋ ਜਾ ਠੀਕ ਹੈ ਜੀ ਇਹ ਵੀ ਛੁਟਾ ਫਿਰ ਫਾਸ ਨਾ ਪਾਏ ਜੋ ਫਿਰ ਫਾਸ ਲੁਆਏ ਹੂੰ ਇਸ ਤਰੀਕੇ ਨਾਲ ਫਿਰ ਛੁੱਟਦਾ ਫਾਸ ਫਿਰ ਪੈਦਾ ਵੇਗਾ <laughs> <laughs> <laughs>